दूती बास सैया मैं कहा देखन जाओ त्रिया तोह ਕੋ को ਪਠਾਈ राए पठाई ताही ते हओ सब गोआरन ते उठ कै तवही तुमरे पह आई तू अभिमान कै बैठ रही नहीं मारत है कछ सीख पराई बेग चलो तो संग कहो तुमरो मग हेरत ठाड कन्हाई राधे बास सैया हरि पास ना मैं चल श्याम नामो रे तू पास पठी ए बातन ते कपटी लख पाई पी कपटी तो कहा पयो ग्वारन तू ना लखए कछ पीर पराई यौ कह कह सिर न्याए रही कहै सो ना मान पिख्यो कहू माई दूती बाज सुइया फिर ऐसे कहो चलीए री हा बल मैं हरके पहियों कह आई हो न आतर श्री ब्रजनाथ हो ल्यावत हूं ओ जाए मनाई ਇਥ ਤੂੰ ਕਰ ਮਾਨ ਰਹੀ ਸਜਨੀ ਹਰ ਪੈ ਤੋ ਚਲੋ ਤਜ ਕੈ ਦੁਜਤਾਈ ਤੋ ਬਿਰ ਮੋ ਪੈ ਨਾ ਜਾਤ ਗਇਓ ਕਹਿਓ ਜਾਣਤ ਹੈ ਕਜ ਬਾਤ ਪਰਾਈ ਰਾਧੇ ਬਾਜ ਸੋਈਆ ਉਠਾਈ ਹੁਤੀ ਆਈ ਨਾ ਪੂਛ ਕਹਿਓ ਕਛ ਸੋਰੀ ਜਾਹੇ ਫਿਰ ਕੈ ਹਰ ਪੈ ਇਹ ਤੇ ਕਛ ਲਾਜ ਨਾ ਲਾਗਤ ਤੋਰੀ ਮੋਹ ਪਤੀਆ ਜੂ ਪੈ ਕਬ ਸ਼ਾਮ ਕਹਿ ਕਹੀਓ ਸੋ ਅਹੋਰੀ ਚੰਦਰ ਭਗਾ ਸੰਗ ਪ੍ਰੀਤ ਕਰੋ ਤੂੰ ਸੋ ਨਹੀਂ ਪ੍ਰੀਤ ਕਹਿਓ ਪ੍ਰਭ ਮੋਰੀ ਸੋਨ ਕਹਿ ਇਹ ਰਾਤ ਕਾ ਕੀ ਬੰਧਿਆ ਤਵ ਸੋ ਉਠ ਗਵਾਰਨ ਪਾਇਨ ਲਾਗੀ ਪ੍ਰੀਤ ਕਹਿਓ ਹਰ ਕੀ ਤੂੰ ਸੋ ਹਰ ਚੰਦਰ ਭਗਾ ਹੂੰ ਸੋ ਪ੍ਰੀਤ त्यागे ਓਨ ਕੀ ਕਵ ਸ਼ਾਮ ਸਬੁੱਧ ਕਹਿ ਤੁਜ ਦੇਖਨ ਕੇ ਰਸ ਮੈਂ ਅਨੁਰਾਗੀ ਕਾਹੀ ਤੇ ਬਾਲ ਬੁਲਾਏ ਲਿਓ ਤੇਰੀ ਮੈਂ ਬੇਗ ਚਲੋ ਹਰ ਪੈ ਬੜ ਭਾਗੀ ਸੋਈਆ ब्रज लाल मुलावट है चलीए कज जानत है रस बातियानी तोहि को श्याम निहारत है तुमरे बिन री नहीं पीवत पानी तू ए पांत कह मुकते नहीं जाओगी हो हरि पै ए बानी ताही ते जानत हो सजनी अब जोगनु ਬੈਠ ਰਹੀ ਬਗਤਾਂ ਧਰੇ ਸਭ ਜਾਣਤ ਪ੍ਰੀਤ ਕੋ ਪਾਵਨ 네રો ਤੂੰ ਸੰਗ ਤਉ ਮੈਂ ਕਹੋ ਸਜਣੀ ਕਹਿਵੇ ਕਹੋ ਜੋ ਉਮਗਿਓ ਮਨ ਮੇਰੋ ਆਬਦ ਹੈ ਮਮੋ ਮਨ ਮੈਂ ਦਿਨ ਚਾਰ ਕੋ ਪਾਹਨ ਜੋ ਬਨ ਤੇਰੋ ਤਾਕੇ ਨਾ ਪਾਸ ਚਲੈ ਉਠਕੇ ਕਬ ਸ਼ਾਮ ਜੋ ਸਭ ਲੋਗਨ ਭੋਗੀ ਤਾਤੇ ਰਹੀ ਹਟ ਬੈਠ ਤਰੀਆ ਉਨ ਕੋ ਕਜ ਜੈ ਗੋ ਨਾ ਆਪਨ ਖੋਗੀ जोबन को जो गुमान करए थे जोवन की सुदसाए होगी तो तज कै सो जो रम है जिमे कंद पै जोगी नैन कुरंगन से तुम सम के हर की कटरी सुन त्वए है आनन सुंदर है सस सो जेह की पुन कंज बराबर क्वए बैठ रही हट बांध कनो ते ते नहीं सुन क्वए है ए तनु सो तो बैर करयो हार स्यो हाठ हे तुमरो कहो होवै है सोइया सुनकै एहे क्वारन की बतिया मृगभाण सुतायत रोस भरी नैन चाय चढ़ाय कै भौं हन पै मन मै संक्रोश जरी जो आई मनावन क्वारन थी ते सो बतियाय पै उचरी सही काहे को हो पास चलौ हरि की कछ मोह परवाह परी ਯੋ ਇਹ ਉੱਤਰ ਦੇਤ ਪਈ ਤਬ ਜਾ ਬਿਦਸੋ ਓਨ ਬਾਤ ਕਰੀ ਹੈ ਰਾਧੇ ਬੁਲਾਇ ਲਿਓ ਰੋਸ ਕਰੋ ਨਾ ਕਿਉ ਕਰ ਕੋਪ ਕੇ ਸੰਗ ਭਰੀ ਤੂੰ ਰਹੀ ਕਰ ਕੈ ਉਤਹੇਰਤ ਪੈ ਰਿਪ ਚੰਦ ਹਰੀ ਹੈ ਤੂੰ ਨਾ ਕਰੈ ਪ੍ਰਵਾਹ ਹਰੀ ਹਰਿ ਕਉ ਪ੍ਰਵਾਹ ਪਰੀ ਹੈ ਸੋਈਆ ਯੋ ਕਹਿ ਬਾਤ ਕਈ ਫਿਰ ਯੋ ਉਠ ਭੇਗ ਚਲੋ ਚਲ ਹੋ ਹੋ ਸੰਜੋਗੀ ਆਹੀ ਕੇ ਨੈਣ ਲਗੇ ਈ ਠੌਰ ਜੋ ਸਭ ਲੋਗਨ ਕੋ ਰਸ ਭੋਗੀ ਤਾ ਕੇ ਪਾਸ ਚ ਸਜਨੀ ਉਨ ਕੋ ਕਛ ਜੈ ਹੈ ਨਾ ਆਪਨ ਖੋਗੀ ਤੈ ਮੁਖਰੀ ਰੀ ਬਲ ਦੇਖਨ ਕੋ ਜਦ ਕੇ ਨੈਣ ਪਏ ਧੂਪਯੋਗੀ ਦੇਖਤ ਹੈ ਦੇ ਔਰ ਤਰੀਆ ਤੂੰ ਰੋਇ ਸੁਨੋ ਬਲ ਪੰਥ ਨਿਹਾਰੈ ਤੇਰੇ ਹੀ ਧਿਆਨ ਬਿਖੈ اٹਕੇ ਤੁਮਰੀ ਹੀ ਕਿਰੋ ਬਰ ਬਾਤ ਉਚਾਰੈ ਝੂਮ ਗਿਰੈ ਕਬ ਹੂੰ ਤਰਨੀ ਪਰ ਤਵੈ ਮਦ ਆਪਨ ਆਪ ਸੰਭਾਰੈ ਕੌਣ ਸਮੈ ਸਗੀ ਤੋਹੇ ਚਿਤਾਰਕੈ ਸਿਆਮ ਜੂ ਮੈਨ ਕੋ ਮਾਨ ਨਿਵਾਰੈ ਸੋਇਆ ਥਾਤੇ ਨ ਮਾਨ ਕਰੋ ਸਜਨੀ ਉਠ ਭੇ ਚਲੋ ਕਛ ਸੰਕ ਨਯਾਨੋ ਸਿਆਮ ਕੀ ਬਾਤ ਸੁਨੋ ਹਮ ਤੇ ਤੁਮਰੇ ਚਿਤ ਮੈ ਅਪਨੋ ਚਿਤ ਮਾਨੋ ਤੇਰੇ ਹੀ ਧਿਆਨ ਫਸੇ ਹਰ ਜੂ ਕਰ ਕੈ ਮਨ ਸੋਕ ਅਸੋਕ ਬਹਾਨੋ ਮੂੜ ਰਹੀ ਅਵਲਾ ਕਰ ਮਾਨ ਕਛੂ ਹਰ ਕੋ ਨਹੀਂ ਹੈਤ ਪਛਾਨੋ ਗਵਾਰਨ ਕੀ ਸੁਨ ਕੈ ਬਤੀਆ ਤਬ ਰਾਧ ਕਾ ਉੱਤਰ ਦੇਤ ਪਈ ਕਿਹ ਹੇਤ ਕਹੋ ਤਜ ਕੇ ਹਰੀ ਪਾਸ ਮਨਾਵਨ ਮੋਕੇ ਕਾਜ ਤਈ ਨਹੀਂ ਹਉ ਚਲ ਹੋ ਹਰੀ ਪਾਸ ਕਹੋ ਤੁਮ ਤੋ ਕਹਾ ਗਤ ਹੋਇ ਹੈ ਦਈ ਸਖੀ ਔਰ ਨਾਮ ਸੋ ਮੂੜ ਤਰੈ ਨ ਲਖੈ ਇਹ ਕੇ ਮੂੜ ਮਈ ਸੁਨ ਕੈ ਬ੍ਰਿਖ ਭਾਨ ਸੁਤਾ ਕੋ ਕਹੋ ਇਹ ਪਾਂਥ ਸੋ ਗਵਾਰਨ ਉੱਤਰਦੀਨੋ ਰੀ ਸੁਨ ਗਵਾਰਨ ਬੋ ਬਤੀਆ ਤੈਨ ਹੂ ਮੁਖਤੇ ਕੇ ਤੂੰ ਮੂੜ ਮੈਂ ਮੂੜ ਤੁਹੀ ਮਨ ਮੈਂ ਕਰ ਮੈਂ ਜਦੁਰਾਏ ਕੀ ਭੇਦੀ ਐ ਸੁਨ ਤੈ ਜਦੁਰਾਏ ਹੂ ਸੋ ਹਟ ਕੀਨੋ ਯੋ ਕਹਿ ਕੈ ਪਾਤ ਕਹਿਓ ਚਲਿਐ ਉਠ ਕੈ ਬਾਲੀ ਸੰਕ ਨਾਨੋ ਤੋਹੀ ਸੋਹੇਤ ਕਨੋ ਹਰਿ ਕੋ ਤੇ ਤੇ ਤੂੰ ਕਹਿਓ ਸਾਚੀ ਜਾਨੋ ਪਾਇਨ ਤੋਰੇ ਪਰੋ ਨਾ ਹਟ ਦੂਰ ਕਰੋ ਕਬ ਹੂੰ ਮਾਨੋ ਤਾ ਤੇ ਸੰਕ ਚਲੋ ਤਜ ਸੰਕ ਕਿਦੋ ਹਰ ਕੀ ਵਾਹ ਪ੍ਰੀਤ ਪਛਾਨੋ ਸਵਿਆ कुंजन वै सकी रात समय हर खेल करे तुम सो बन में जितनु उनको हित है तोहि सो हित ते नहीं आदिक है उन में मुरझाए गए बिन तुए हर दू न खेलत है गुनगुवार नु में तेते सुन बेग निसंक चलो ओंकार कह शुद्ध पै बन की मन में श्याम ਬੈਠ ਰਹੀ ਕਰਮਾਨ ਕਨੂ ਕਛ ਔਰ ਨਹੂ ਕੋ ਕਹਿਓ ਸੁਨ ਲਈ ਤਾਤੇ ਹੋ ਬਾਤ ਕਰੋ ਤੁਮ ਸੋ ਇਹ ਤੇ ਨਾ ਕਛੂ ਤੂੰ ਰੋ ਕਹਿਓ ਛੀ ਜਾ ਰਾਧੇ ਬਾਜ ਤੂਤੀ ਸੋ ਸਵਿਆ ਮੈਂ ਨਾ ਹਸੋਂ ਹਰ ਪਾਸ ਚਲੋਂ ਨਹੀਂ ਜਾਓ ਤੋ ਸਖੀ ਕੋਟ ਕੇ ਆਵੈ ਆਏ ਉਪਾਵ ਅਨੇਕ ਕਰੈ ਅਰ ਪਾਣੇ ਨਹੀਂ ਉਪਰ ਥੀਸ ਨੇ ਆਵੈ ਮੈਂ ਕਭੂ ਨਹੀਂ ਜਾਓ ਤਹਾਂ ਤੋਸੀ ਕਹਿ ਕੋਟਕ ਬਾਤ ਬਨਾਵੇ ਔਰ ਕੀ ਕਵਨ ਗਨੇ ਕਨਤੀ ਬਲ ਆਪਨ ਕਾਨ ਜੂ ਸੀਸ ਝੁਕਾਵੇ ਪ੍ਰਤੀ ਉੱਤਰ ਇਨ ਐਸੀ ਕਹੀ ਬਤੀਆ ਤਵੀ ਉਹ ਗਵਾਰਨ ਜੋ ਕਯੋ ਹੋਰੀ ਜੋ ਹਮ ਬਾਤ ਕਹੀ ਚਲੀਐ ਤੋ ਕਹੈ ਹਮ ਸਿਆਮ ਸੋ ਪ੍ਰੀਤੀ ਛੋਰੀ ਸਿਆਮ ਸੋ ਮਾਈ ਕਹਾ ਕਹੀਐ ਇਹ ਸਾਥ ਕਰੈ ਹਿਤਵਾ ਵਰ ਜੋਰੀ ਪੇਜਤ ਹੈ ਹਮ ਕੋ ਇਹ ਪੈ ਏਸੀ ਤੇ ਕੇ ਪਹਿ ਗਵਾਰਨ ਥੋਰੀ ਪੇਜਤ ਹੈ ਜੇ ਪੈ ਹਮ ਕੋ ਇਹ ਗਵਾਰਨ ਰੂਪ ਕੋ ਮਾਨ ਕਰੈ ਹੈ ਹਮ ਤੇ ਤਿਹ ਤੇ ਹੱਠ ਬਾੰਦ ਰਹੀ ਨਾ ਤਰੈ ਕਲ ਸ਼ਾਮ ਪਖੋ ਇਹ ਗਵਾਰਨ ਕੀ ਮਤ ਸ਼ਾਮ ਕੇ ਕੋਪ ਤੇ ਪੈ ਨਾ ਡਰੈ ਤੇ ਸੋ ਬਲ ਜਾਓ ਕਹਾ ਕਈਐ ਲਿਆਵੋ ਜੋ ਮੁਖ ਤੇ ਉਚਰੈ ਸੋਈਆ ਸ਼ਾਮ ਕਰੈ ਸਖੀ ਔਰ ਸੋ ਪ੍ਰੀ ਤਬੈ ਇਹ ਗਵਾਰਨ ਭੂਲ ਪਛਾਨੈ ਵਾਹ ਕੇ ਰੀ ਸਜਨੀ ਸੋ ਰਹੀ ਕਹਿ ਕੈ ਸੋ ਕਹਿਉ ਨਹੀਂ ਮਾਨੈ ਯਾ ਕੋ ਵਿਸਾਰ ਡਰੇ ਮਨ ਤੇ ਤਬਹੀ ਇਹ ਮਾਨੈ ਕੋ ਫਲ ਜਾਣੈ ਅੰਤ ਘਸਾਇ ਕਨੀ ਅਕਲਾਏ ਕਹਿਉ ਤਬਹੀ ਇਹ ਮਾਨੈ ਤੂੰ ਮਾਨੈ ਯਾ ਸੁਨ ਕੈ ਬ੍ਰਿਖ ਸੁਤਾ ਦੇ ਗਵਾਰਨ ਕੋ ਜਿਉ ਉਤਰਦੀਨੋ रीत ਕਰੀ हरचन्द्र ਭਗਾ ਸੰਗ ਤਉ ਹਮ ਹੂ અપਮਾਨ ਸੋ ਕੀਨੋ ਤਉ ਸਜਨੀ ਕਹੋ ਰੂਠ ਰਹੀ ਅਤ ਕ੍ਰੋਧ ਵੜਿਓ ਹਮਰੇ ਜਬ ਜੀਨੋ ਤੋਰੇ ਕਹਿ ਬਿਨ ਰੀ ਹਰਿ ਆਗੇ ਹੂੰ ਮੋ ਸੋਨਿਓ ਬਿਦਾ ਕਰਦੀਨੋ ਸੋਇਆ ਜੋ ਕਹਿ ਗਵਾਰਨ ਸੋ ਬਤੀਆ ਕਬ ਸ਼ਾਮ ਕਹੈ ਫਿਰ ਐਸੇ ਕਹੋ ਹੈ ਜਾਹੇਰੀ ਕੋ ਬੈਠੀ ਐ ਗਵਾਰਨ ਤੇਰੋ ਕਹੋ ਅਤ ਹੀ ਮੈਂ ਸਹੋ ਹੈ ਬਾਤ ਕਹੀ ਅਤ ਰਸ ਕੀ ਤੋਇ ਨਾ ਸੋ ਸਕੀ ਚਿਤ ਚੈ ਹੋਐ ਆਹੀ ਤੇ ਹੋ ਨਾ ਚਲੋ ਸਜਨੀ ਹਮ ਸੋ ਹਰ ਸੋ ਰਸ ਕੌਣ ਰਹੋਐ ਯੋਂ ਸੁਨ ਉੱਤਰ ਦੇਤ ਪਈ ਕਬ ਸ਼ਾਮ ਕਹੈ ਹਰ ਕੇ ਹਿਤ ਕੇ ਰੋ ਕਾਨ ਕੇ ਭੇਜੇ ਤੇ ਯਾਪ ਹੈ ਆਏ ਕਹਿ ਕਹਿ ਕੈ ਮਨਾ ਕੋ ਅਤ ਝੇਰੋ ਸ਼ਾਮ ਚ ਕੋਰ ਮਨੈ ਤਨ ਜੋ ਸੁਨਰੀ ਏ ਭਾਂਤ ਕਹੈ ਮਨ ਮੇਰੋ ताहि निहार निहार समो सासी सो मुख देखद हवै है री तेरो राधे बास विया देखद है तो काभ्यो गुवारन मैं ना तेह के पह जए हो काहे के काज राहन री सहे हो अपनो पत देख गहै हो श्याम रचै संगौर त्रिया तेके पह जाए कहा जस पै हो ताते पधारो री सजनी हर को नह जीवत रूप दिखै हो ਅਥ ਮਹਿਨ ਪ੍ਰਵਾਹ ਕ੍ਰਿਸ਼ਨ ਦੀ ਪਾਸ ਫਿਰ ਆਈ ਦੂਤੀ ਬਾਤ ਕਾਨ ਜੂ ਸੋ ਸੋਈਆ ਯੋ ਜਵਤਾਏ ਸੁਨੀ ਬਤੀਆ ਉਠ ਕੈ ਸੋ ਉਨੰਦ ਲਲਾਪ ਆਈ ਆਏ ਕਐ ਐਸੇ ਕਯੋ ਹਰ ਪੈ ਹਰ ਜੂ ਨਹਿ ਮਾਨਤ ਮੂੜ ਮਨਾਈ ਕੈ ਤਜ ਬਾਹਿਰ ਚੋ ਇਨਸੋ ਨਹੀਂ ਆਪਨ ਜਾਏ ਕੈ ਲਿਆਓ ਮਨਾਈ ਯੋ ਬਾਤ ਚਲਿਓ ਤੇ ਕੋ ਕਵ ਸ਼ਾਮ ਕਹੈ ਹੀ ਧਾਈ ਸੋਈਆ और नागुार्न को पठी चल कै हरजू तव आपि आयो ताही को रूप निहार ब्रिग भाण सुता मन मै सुख पायो पाए कनो सुख पै मन मै अति ऊपर मान सो बोल सुनायो चंद्र पगाहु सो केल करो ए ठोर कहा तज लाजाय आयो राधे बाज कानजू सो सोइया रासय क्यों तज चंद्र पगा चल कै पह क्यों कहो आयो ਕਿਉ ਇਹ ਗਵਰਨ ਕੀ ਸਿਖ ਮਾਨ ਕੈ ਆਪਨ ਹੀ ਉਠ ਕੈ ਸਗੀ ਧਾਇਓ ਜਾਣ ਤੀ ਕੀ ਕੇ ਬਡੋ ਠੱਗ ਹੈ ਇਹ ਬਾਤਨ ਤੇ ਅਭੀ ਲਖ ਪਾਇਓ ਕਿਉ ਹਮਰੇ ਪਹਿ ਆਏ ਕਹਯੋ ਹਮ ਤੋ ਤੁਮ ਕੋ ਨਹੀਂ ਬੋਲ ਪਠਾਇਓ ਕਾਣ ਜੂ ਬਾਜ ਰਾਦੇ ਸੋ ਸੋਈਆ ਯੋ ਸੁਨ ਉੱਤਰ ਦੇਤ ਪਇਓ ਨਹਿਰੀ ਤੋਹੇ ਗਵਰਨ ਬੋਲ ਪਠਾਇਓ ਨੈਨਨ ਕੇ ਕਰ ਭਾਵ ਕਨੇ ਸਰ ਸੋਹ ਹਮ ਰੋ ਮਨਵਾ ਤਾ ਰਹਾ ਗਨ ਸੋ ਸੁਨੀਐ ਬਲ ਅੰਗ ਦਰਿਓ ਸੋ ਗਇਓ ਨਾ ਬਚਾਇਓ ਤੇਰੋ ਬੁਲਾਇਓ ਨਾ ਆਇਓ ਹੋਰੀ ਸਕੀ ਤੇ ਠੌਰ ਜਰੇ ਕਹੋ ਸੇ ਕਿਨ ਸੋ ਸੁਈਆ ਸੰਗ ਫਿਰੀ ਤੁਮਰੇ ਹਰ ਖੇਲ ਸਿ ਸ਼ਾਮ ਕਹੈ ਕਬ ਆਨੰਦ ਕੋ ਹੁ ਬਹਾਸ ਸਹਿਓ ਚੀਨ ਕੈ ਔਰ ਨਾ ਚੀਨੀ ਹੀਤ ਕਰਿਓ ਅਤ ਹੀ ਤੁਮ ਸੋ ਤੁਮ ਤਜ ਹੀਤ ਦਸਾ ਏ ਕੀਨੀ प्रीत करी संग और क्रिया कह श्वास लेओ अखियां भरनी नी कान जु आवाज सैया मेरो कनो हित है तुम सो सखी और किसी नह गवार नमाहि तेरे खरे तोय देख तु बिन त्वए तोहे मूर्त की परछाई योग क कान गही बइया चलिया हम सो बन में सुख पाही हा हा चल मेरी सो मेरी सो मेरी, सो, मेरी सो। ਤੇਰੀ ਸੋ ਤੇਰੀ ਸੋ ਨਾਹ ਜੂ ਨਾਹੀ ਯੋ ਕਹਿ ਕਾਨ ਗਹੀ ਬਈਆ ਤਿਉ ਲੋਗਨ ਕੋ ਪੁਗਿਆ ਰਸ ਜੋ ਹੈ ਕੇ ਹਰ ਸੇਖ ਜੇ ਕੀ ਕਟ ਹੈ ਜੇ ਆਨਨ ਪੈ ਸਸ ਕੋ ਹੈ ਐਸੇ ਕਹੋ ਚਲੀਐ ਹਮਰੇ ਸੰਗ ਜੋ ਸਭ ਗਵਾਰਨ ਕੋ ਮਨ ਹੈ ਯੋ ਕਹਿ ਕਾਹੇ ਕਰੋ ਬਿੰਤੀ ਸੁਨ ਕੈ ਤੋਹੇ ਲਾਲ ਹੀ ਐ ਮਦ ਜੋ ਹੈ ਕਾਏ ਉਰਾਹਨ ਦੇ ਸਕੀ ਕਹੋ ਪ੍ਰੀਤ ਕਨੀ ਹਮਰੀ ਸੰਗ ਤੇਰੇ ਨਾਹਕ ਤੂੰ ਪਰਮੀ ਮਨ ਮੈਂ ਕਛ ਬਾਤ ਨ ਚੰਦਰ ਪਗਾ ਮਨ ਮੇਰੇ ਤਾਤੇ ਉਠੋ ਤਜ ਤਜਮਾਨ ਸਵੇ ਚਲ ਖੇਲੇ ਪੈ ਜਮਨਾ ਤਟ ਕੇਰੇ ਮਾਨਤ ਹੈ ਨਾ ਬਾਤ ਟੀ ਬਿਰਾਤੁਰ ਹੈ ਬਿਰੀ ਜਨ ਟੇਰੇ ਤਿਆਗ ਕਯੋ ਅਬ ਮਾਨ ਸਗੀ ਹਮ ਹੂੰ ਤੁਮ ਬਨ ਬੀਚ ਪਧਾਰੈ ਨਾ ਤੂੰ ਰਿਸੀ ਮਨ ਮੈਂ ਨਹੀਂ ਆਰਤਿਆ ਮਨ ਬਾਤ ਹਮਾਰੇ ਤਾਤੇ ਅਸੋਖ ਕੇ ਸਾਥ ਚਲ ਤੀਰ ਨਦੀ ਸਭ ਸੋ ਕਹਿ ਡਾਰੈ ਯਾਤੇ ਨਾ ਔਰ ਭਲੀ ਕਜ ਹੈ ਮਿਲ ਕੈ ਹਮ ਮੈਨ ਨਿਵਾਰੈ ਕਹੋਨ ਸਾਤਰ ਹੈ ਆਤੀ ਬ੍ਰਿਖ ਤਾਹੇ ਮਨੀ ਹਰ ਬਾਤ ਸੋ ਤਿਨ ਮਾਨ ਕੀ ਬਾਤ ਵਿਦਾ ਕਰ ਡਾਰੀ ਹਾਥ ਤਿਸੋ ਬਹੀ ਆਗੈ ਸਿਆਮ ਸੋ ਐਸੇ ਕਹਯੋ ਅਬ ਖੇਲੈ ਯਾਰੀ ਕਾਨ ਕਯੋ ਤਵ ਰਾਤ ਕਾਸੋ ਹਮਰੇ ਸੰਗ ਖੇਲ ਮੋਰੀ ਪਿਆਰੀ ਰਾਦੇ ਬਾਜ ਕਾਨ ਸੋ ਸੁਈਆ ਯੋ ਸੁਨ ਕੇ ਪ੍ਰਿਖ ਸੁਤਾ ਅਨੰਦ ਲਾਲ ਲਲਾ ਕਹ ਉਤਰ ਸੋ ਬਾਤ ਕਹੋ ਹਰ ਜੂ ਜਿਹ ਕੇ ਸੰਗ ਨੇਹੋ ਕਰੋ ਤੁਮ ਕੀਨੋ ਮੋਰੀ ਗਹੀ ਬਹੀਆ ਸੁ ਦੁਖ ਆਵਤ ਹੋ ਮੋਏ ਜੀਨੋ ਯੋ ਕਹਿ ਬਾਤ ਪਰੀ ਅਖੀਆਂ ਕਰ ਕਹਿ ਦੁਖ ਸਵਾਸ ਸਾਸੋ ਲੀਨੋ ਸੁਈਆ ਕੇਲ ਕਰੋ ਮਨ ਗਵਾਰ ਨੂੰ ਸੋਜ ਜਿਨ ਸੰਗ ਰਚੋ ਮਨ ਹੈ ਸੋ ਤੁਮਾਰੋ ਸਵਾਸਨ ਲੈ ਅਖੀਆਂ ਭਰ ਕੈ ਅਮ੍ਰਿਖ ਭਾਨ ਸੁਤਾਏ ਪਉ ਤੂ ਚਾਰੋ ਸੰਗ ਚਲੋ ਨਹਿ ਹਉ ਤੁਮਰੇ ਕਰ ਨਹੀਂ ਮਾਰੋ ਸਾਥ ਕਹੋ ਤੁਮ ਸੋ ਬਤੀਆਂ ਤਜ ਕਹਿ ਹਮ ਕੋ ਜਦ ਵੀਰ ਪਧਾਰੋ ਬਾਜ ਰਾ ਦੇ ਸੋ ਸੁਈਆ ਸੰਗ ਚਲੋ ਖਮਰੇ ਉਠ ਕਹਿ ਸਕੀ ਮਾਨ ਕਚੂ ਮਨ ਮੈਂ ਨਹੀਂ ਆਨੋ आयोग हो तज संक निसंक कछु ते ते रस री तो पहचानो मित्र के बेचे किदो बिकिया ਸਖੀ सरोन सुनो सखी प्रीत कानो ताते हो तेरी करो विनती कहवे मोए मान सखी अब मानो राधे बाज सुइया यो सुन कै हर की बतिया हार को दिन याब उत्तर दीनो प्रीत रही हमसों तुमरी कहां यौ कह कै दीर्घ प्रीत ਕਰੀ संग चंद्र पगा अति कोप कढयो ਤੇ ते मोहे जीनो यौ क कह परसवास लेओ कब श्याम कह अति ही कपटी नोम सवैया क्रोध परी फिर बोल उठि बिरघ भान सुता मुख सुंदर सयो तुम सो हम सो रस कौन रहयो कब श्याम कह बिदके पह जयो हर यौ कह मोहित है तह सो उन कोप कयो हम सो ਤੁਮਰੇ ਸੰਕੇਲ ਕਰੇ ਮਨ ਮੈਂ ਸੁਨੀਐ ਬਤਿਆ ਹਮਰੀ ਬਲਿਓ ਕਾਨ ਜੂ ਬਾਜ ਰਾਦੇ ਸੋ ਸਵੀਆ ਮੋਇ ਹੋ ਤੇਰੋ ਸਖੀ ਚਲਬੋ ਪਿਖ ਮੋਇ ਹੋ ਸੋ ਹਉ ਦ੍ਰਿਗ ਪੇਖਤ ਤੇਰੇ ਮੋਹਿ ਰਹਿਓ ਅਲ ਕਹਿ ਤੂਰੀ ਪਿਖ ਜਾਤ ਗਇਓ ਤਦ ਨਹੀਂ ਡੇਰੇ ਮੋਹਿ ਰਹਿਓ ਤੋ ਨਿਹਾਰਤ ਪ੍ਰੀਤ ਬਢੀ ਤੇ ਮਨ ਮੇਰੇ ਮੋਹਿ ਰਹਿਓ ਮੁਖ ਤੇਰੋ ਨਿਹਾਰਤ ਜੋ ਚੰਦ ਚ ਪੂਰਨ 헤ਰੇ ਤਾਤੇ ਨਾਮਾਨ ਕਰੋ ਸਜਨੀ ਮੋਹ ਸੰਗ ਚਲੋ ਉੱਠ ਕੇ ਅਭੀ ਹਮਰੀ ਤੁਮ ਸੋ ਪ੍ਰੀਤ ਕਣੀ ਕੁਪ ਕਹੋ ਤਜ ਕੈ ਸਭੀ ਤੇ ਤੇ ਇਹ ਛੁਦਰ ਬਾਤ ਕੀ ਰੀਤ ਕਹਿਓ ਨਾਰੀ ਤੁਮ ਕੋ ਫਭੀ ਤੇ ਤੇ ਸੁਨ ਮੋ ਬਿੰਤੀ ਚੱਲੀਐ ਇਹ ਕਾਜ ਕੀਏ ਨਾ ਕਛੂ ਲਭੀ ਸੋਈਆ ਹਥੀ ਜਬ ਕਾਨ ਕਰੀ ਬਿੰਤੀ ਤਬਹੀ ਮਨ ਰੰਚ ਸੋ ਮਾਨੀ ਦੂਰ ਕਰੀ ਮਨ ਕੀ ਗਨਤੀ ਜਬ ਹੀ ਹਰ ਕੀ ਤਨ ਪ੍ਰੀਤ ਪਛਾਨੀ ਤਉ ਇਮ ਉੱਤਰ ਦੇਤ ਪਈ ਜੋ ਸੁੰਦਰਤਾ ਮਹਤਰੀ ਅਨ ਰਾਣੀ ਤਿਆਗ ਦਈ ਦੁਚਤਈ ਮਨ ਕੀ ਹਰ ਸੋ ਰਸ ਬਾਤਨ ਸੋ ਨਿਜ ਕਾਨੀ ਕਹੋ ਚਲਿਐ ਹਮਰੇ ਸੰਗ ਜਾਣਤ ਹੋ ਰਸ ਸਾਥ ਸੰਗ ਲੈ ਸਹੀ ਜਾਣ ਗੁਵਾਰਨ ਸੰਗ ਅਰੋਗੇ ਹਉ ਨਹੀਂ ਹਾਰ ਹਉ ਪੈ ਤੁਮ ਤੇ ਤੁਮ ਹੀ ਖਮਤੇ ਹਰੀ ਹਾਰ ਪਰੋਗੇ ਏਕ ਨਾ ਜਾਣ ਤੂੰ ਕੁੰਜ ਗਲੀਨ ਲਵਾਏ ਕਹੋ ਕਜ ਕਾਜ ਕਰੋਗੇ ਬ੍ਰਿਖਪਾਣ ਸੁਤਾ ਕਬ ਸ਼ਾਮ ਕਹੈ ਅਤ ਜੋ ਰਸ ਪੀ ਬ੍ਰਿਜਨਾਥ ਕਹੋ ਹਸ ਕੇ ਛਵ ਕੀ ਅਤ ਸੁੰਦਰ ਚੀਨੀ ਤਾ ਛਵ ਕੀ ਅਤ ਹੀ ਉਪਮਾ ਮਨ ਮੈਂ ਜੋ ਪਈ ਕਬ ਕੇ ਸੋ ਕੀਨੀ ਜਿਉ ਕਨ ਬੀਜ ਲਸੈ ਚਪਲਾ ਤਹ ਕੋ ਠਗ ਗੇ ਠਗਨੀ ਠਗ ਲਈਨੀ ब्रघपान सुधा कब श्याम कहे अति जो हर के रस पी तरपीनी बीच हलास बडयो मन के जब कान की बात सब है मन लीनी कुंज गली में खेलेगे हर के तिन संग कहो सो कीनी यूं हस बात में संग कहो मन की दुजतई सब ही तज दीनी सवेया दूजो हस बातन संग ठरे तो हलास विलास बढे सगरो ਹਸ ਕੰਠ ਲਗਾਏ ਲਈ ਲਲਨਾ ਗੈ ਗਾੜੇ ਅਨੰਗ ਤੇ ਅੰਖ ਪਰੇ ਤਰਕੀ ਹੈ ਤਨੀ ਦਰਕੀ ਕੀ ਅੰਗੀਆਂ ਘਰ ਤੇ ਟੂਟ ਕੈ ਲਾਲ ਪਰੇ ਪੀ ਕੇ ਮਿਲੇ ਤ੍ਰਿਕੇ ਤੇ ਅੰਗਰਾ ਬਿਰਹਾ ਗਨ ਕੇ ਨਿਕਰੇ ਹਰ ਰਾਤ ਕਾ ਸੰਗ ਚਲੇ ਬਨ ਲੈ ਕਬ ਸਿਆਮ ਕਹੈ ਮਨ ਆਨੰਦ ਪਾਇਓ ਗਲੀਨ ਮੈਂ ਕੇਲ ਕਰੇ ਮਨ ਕੋ ਸਭ ਸੋਗ ਉਤੇ ਤਾਹੀ ਕਥਾ ਕਉ ਕਿਦੋ ਜਗ ਮੈਂ ਮਨ ਮੈਂ ਸੁਖਿਆਦਿਕ ਗਾਇ ਸੁਨਾਇਓ ਜੋ ਸੋ ਰੀਜ ਰਹੈ ਜਿਹ ਸਭ ਹੀ ਧਰਮੈ ਜਸ ਜੂ ਬਾਜ ਰਹਾ ਕਾ ਸੰਗ ਕਹੀ ਜਮਨਾ ਮੈਂ ਤਰੋ ਤੁਮ ਹੈ ਜਲ ਮੈਂ ਹਮ ਕੇਲ ਕਰੈ ਗੈ ਸੁਨੋ ਰਸ ਬਾਤ ਸਭੈ ਸੋ ਤਹਾਂ ਜੇ ਔਰ ਨਿਹਾਰ ਬਦੂ ਬ੍ਰਿਧ ਕੀ ਲਗ ਚਾਏ ਮਨੋ ਪਿਖ ਹੈ ਪਹੁੰਚੈਗੀ ਨਹੀਂ ਤੇ ਗਵਾਰਨੀ ਹਮ ਹੂੰ ਤੁਮ ਰੀਜ ਤਾ ਰਹਿ ਸੋਇਆ ਬ੍ਰਿਖਪਾਣ ਸੁਤਾ ਹਰ ਕੇ ਮੁਖ ਤੇ ਜਲ ਪੈਠਨ ਕੀ ਬਤੀਆ ਸੁਨ ਪਾਈ ਤਾਏ ਕਹਿ ਜਾਏ ਪਰੀ ਸ਼ਰਮੈ ਕਰ ਕੈ ਅਤਹੀ ਬ੍ਰਿਜਨਾਥ ਬਜਾਈ ਤਾਈ ਕੇ ਪਾਛੇ ਤੇ ਸਿਆਮ ਭਰੇ ਕਵਕੇ ਮਨ ਮੈਂ ਉਪਮਾ ਇਹ ਆਈ ਮਾਨੋ ਸਿਆਮ ਜੁ ਬਾਜ ਪਰਿਓ ਪੇਖ ਕੈ ਬ੍ਰਿਜਨਾਰ ਕੋ ਜਿਉ ਮੁਰਗਾਈ ਬ੍ਰਿਜਨਾਥ ਤਬੈ ਤਸ ਕੈ ਜਲ ਜਲਮ ਬ੍ਰਿਜਨਾਰ ਸੋ ਤਬ ਜਾਏ ਗਹੀ ਹਰ ਕੋ ਤਨ ਭੇਟ ਹੁਲਾਸ ਵਡਿਓ ਗਿਨਤੀ ਮਨ ਕੀ ਜਲ ਪਾਤ ਬਹੀ ਜੋ ਆਨੰਦ ਬੀਜ ਵਡਿਓ ਮਨ ਕੇ ਕਬ ਤਉ ਮੁਖਤੇ ਕਥ ਭਾਕ ਕਹੀ ਪਿਖਿਓ ਜਨ ਹੂ ਜ ਰਿਓ ਪਿਖ ਕਹਿ ਜਮਨਾ ਜਹਿਰੀ ਜ ਰਹੀ ਜਲ ਤੇ ਕਟ ਕਹਿ ਫਿਰ ਘਾਰਨ ਸੋ ਕਬ ਸਿਆਮ ਕਹਿ ਫਿਰ ਰਾਸ ਮਚਾਇਓ ਗਾਵਤ ਥੀ ਬ੍ਰਿਗ ਭਾਣ ਸੁਤਾ ਅਤ ਹੀ ਮਨ ਭੀਤਰ ਆਨੰਦ ਪਾਇਓ ਬ੍ਰਿਜਨਾਰਨ ਸੋ ਮਿਲ ਕੈ ਬ੍ਰਿਜਨਾਥ ਜੂ ਸਾਰੰਗ ਮੈਂ ਜਿਕ ਤਾਨ ਵਸਾਇਓ ਸੋ ਸੁਨ ਕੈ ਮ੍ਰਿਗ ਧਾਵਤ ਗੁਆਰਨਿ ਆ ਸੁਨ ਕੈ ਸੁਖ ਪਾਇਓ ਦੋਹਰਾ ਸਤਰਾ ਸੈ ਪੈ ਮੈਂ ਕੀਨੀ ਕਥਾ ਸੁਧਾਰ ਚੂਕ ਹੋਏ ਜਹ ਤਹ ਸੋ ਕਾਵੀ ਲੀ ਜਾਓ ਸਕਲ ਸੁਧਾਰ बنت करो दो जोरकारे सुनो जगत के राय मुंह मस्तक तवै पग सदा रह दास के पाए इत श्री दशम सिकंदे पुराणे विचित्र नाटक ग्रंथे कृष्ण अवतारे रास मंडल वर्णनं त्याय समापतः मस्त सुभ मस्त